ਹਰ ਵਾਰ ਚੱਲ ਕੇ ਬੋਲ ਜਿਹੜਾ ਤੇਤਨ ਉਹਨਾਂ ਤੋਂ ਹੋਊਗਾ ਖਾੜਾ ਜਿਹੜਾ ਤੁਹਾਨੂੰ ਝੂਠਾ ਹੀ ਨਹੀਂ ਆ ਜਾ ਵੀ ਉਹਨਾਂ ਦਾ ਸਮਝਾਈਦਾ ਹਾਂ ਕੀਤਾ ਦੇਖੋ ਖਾੜਾ ਆ ਗਿਆ ਹੁਣ ਬੱਲੇ ਖਾੜਾ ਰੱਜ ਗਿਆ ਇਹ ਖਾੜਾ ਰੱਜ ਗਿਆ ਹੁਣ ਟਰਬ ਨੇ 10 20 ਜਿੰਨੇ ਵੇਗਾ ਜੋ ਭਾਈ ਇੱਕੋ ਤੋਂ ਬੈਠੋ 15000 ਏਕੜ ਜ਼ਮੀਨ ਹੈ ਉੱਥੇ ਤੁਸੀਂ ਸਬਸਟਰੋ ਆਪਣਾ ਆਪਣਾ ਸਟੱਡੀ ਕਰੋ ਆਪਾਂ ਕੋਈ ਚੰਗਾ ਹੋਰ ਕੱਢੀਏ ਵਧੀਆ ਜਿਹੜੀ ਗੱਲ ਉਹ ਵਧੀਆ ਚੀਜ਼ ਲੈ ਲੋ ਇਹ ਨਹੀਂ ਕੱਢੀਏ ਵਾਲੀ ਆ ਕੁੜੀ ਨੇ ਕਰੋ ਸਾਰੇ ਇਕੱਠੇ ਗੱਲ ਲੱਗੋ ਨੇ ਦਿਖਾਓ ਕਰਾਵਾਸਾ ਹਾਂ ਉਹਦੇ ਅੱਗੇ ਜਾ ਕੇ ਗਿਆ ਨੂੰ ਹੁਣ ਮੋਰ ਦੇ ਕੋਲ ਸੱਟ ਲੀ ਗਿਆ ਅੱਜ ਇਹ ਸੰਦਰਭ ਚਾਹ ਹਾਂ ਕਰਾਵਾਤਾ ਉਹ ਰਾਜੇ ਨੇ ਸੱਦਈ ਹਾਂ ਉਹ ਹੀ ਰਾਜੇ ਨੇ ਸੱਦਿਆ ਅੱਜ ਤੁਸੀਂ ਕਿੰਨੀ ਦੇਰੀ ਬਣੀ ਸੀ ਉਹ ਫਿਰ ਕਰਾਵਾਤਾ ਵੀ ਇਹ ਹਰ ਹਰ ਜਨ ਕੇ ਮਾਲਕ ਖਜ਼ੀਨਾ ਹਰ ਤਮ ਜਨ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਮਾਲਕ ਜੀ ਤੋਂ ਜਿੰਨਾ ਵੀ ਹੋਵੇ ਨੇ ਉਹਨਾਂ ਦਾ ਖਿਆਲ ਹੈ ਹੀ ਨਹੀਂ ਜਿਹੜੇ ਰਿਕਾਰਡ ਚ ਮਿਲਦੇ ਨੇ ਸਾਨੂੰ ਦੁਨੀਆਂ ਦੇ ਉੱਤੇ ਜਿਹਨੇ ਤੁਹਾਨੂੰ ਸਾਰੇ ਰਾਜ ਕੀਤਾ ਸਾਰੇ ਅਤੇ ਹਰਾ ਗਾਨ ਕੋ ਮਾਲਕੀ ਮਾਲਕੀ ਜੀ ਤੋਂ ਉਹਨਾਂ ਦਾ ਤਾਂ ਮਾਲਕ ਨਾ ਹੋਵੇ ਨਾਮ ਤੋਂ ਬਿਨਾ ਤਾਂ ਨਹੀਂ ਬੋਲਤੇ ਗਏ ਜੀ ਨੂੰ ਤੇ ਫਿਰ ਇਹਦਾ ਧਰਮ ਹੋਰ ਹੋ ਗਿਆ ਦੁਨੀਆ ਦੇ ਸਾਰੇ ਧਰਮ ਅਗਿਆਨਤਾ ਵੱਲੋਂ ਲੈ ਕੇ ਜਾਂਦੇ ਰਹੇ ਮਾਇਆ ਮੋਹ ਵੱਲੋਂ ਲੈ ਕੇ ਜਾਂਦੇ ਰਹੇ ਦੁਸ਼ਮਣੀ ਵੱਲੋਂ ਲੈ ਕੇ ਜਾਂਦੇ ਰਹੇ ਅੱਜ ਮੈਂ ਦੀਚਾ ਮੈਨੂੰ ਕੋ ਪੈਸਾ ਆ ਗਿਆ ਮੈਨੂੰ ਤਾਕਤ ਆ ਵੀ ਮੈਨੂੰ ਉੱਠੋ ਗਿਆ ਉਹਦਾ ਫਿਰ ਜਿਹਾ ਤਜੋਰ ਅਰ ਬੈਠੇ ਸੋ ਨਾਨਕ ਉੱਤਮ ਵੀ ਨਾ ਉੱਤਮ ਨਹੀਂ ਤਾਂ ਫਿਰ ਕੋਈ ਹੋਇਆ ਨਾ ਉਹ ਤਾਂ ਜੋਰ ਹੈ ਪੈਸਾ ਐਸਾ ਆਦਮੀ ਨੇ ਆ ਫਿਰ ਉੱਤਮ ਹੋਰ ਉੱਤਮ ਦੀ ਜਿੱਕੀ ਹੈ ਤੇ ਉਹ ਤਾਂ ਮੇਰੇ ਦਾ ਜਿਹੜਾ ਜੋਰ ਹੈ ਬਸ ਉਹ ਉੱਤਮ ਤੂੰ ਵੀ ਨਹੀਂ ਚੜਾ ਕੋ ਨਾ ਨਾ ਕਰਨੀ ਵੇਸ ਦੀ ਕਾਜ਼ ਨਹੀਂ ਹੈ ਅਲੇ ਮਾਲ ਖੋ ਲੰਨੇ ਤਾਗਾ ਤਾਂ ਨਾ ਕੋਈ ਉਹਨਾਂ ਨੇ ਜਦ ਤੱਕ ਆਹ ਤਾਂ ਸਾਰਿਆਂ ਨੂੰ ਢੁੱਤੀ ਚੁਰਕੀ ਰਾਜਾ ਹੁੰਦਾ ਸਾਰਿਆਂ ਨੂੰ ਜਿੱਤ ਲੈਣ ਤੇ ਗੁਲਾਮ ਬਣਾ ਲੈਣ ਜਿਠਸ ਜੋਰ ਕਰ ਬੈਠੇ ਸੋਏ ਇਹ ਹੈ ਸੰਸਾਰ ਦੀ ਰੀਤ ਜਿਹੜੀ ਕਹੀ ਜਾਂਦੀ ਸਭ ਜੋਰ ਹੈ ਕਰ ਬੈਠੇ ਸੋਏ ਇਹ ਕੀਤਾ ਕ੍ਰਿਸ਼ਨ ਨੇ ਇਹ ਕੀਤਾ ਰਾਮਚੰਦਰ ਨੇ ਜੋ ਇਤਿਹਾਸ ਲਿਖਿਆ ਹੋਇਆ ਹੈ ਇਹ ਕੀਤੇ ਇਸ ਸ੍ਰਾਮ ਵਾਰਿਆਂ ਨੇ ਸਾਰੇ ਵਰਦ ਦੇ ਸ੍ਰਾਮ ਦਲਵਾ ਦੇ ਜੋਰ ਤੇ ਫਲਾਦੇ ਨੇ ਕਿਤਾ ਕਰਦੇ ਹਨ ਤੇ ਪਾਰਸਨਾਥ ਨੇ ਵੀ ਕੀਤਾ ਸਾਡੇ ਕੋਲ ਦੋ ਕਹਾਣੀਆਂ ਹੋਰ ਗਿਆਈ ਪਰ ਉਹਨੇ ਐ ਨਹੀਂ ਕੀਤਾ ਉਹਨੇ ਦੁਨੀਆਵੀ ਤਾਂ ਸਾਰਾ ਲੈ ਕੇ ਕਿਥੋਂ ਕਰਕੇ ਵੰਡ ਦਿੱਤਾ कोई खाओ ਖਾਖੋ ਜਿਹਨੂੰ ਜਿੱਦੀ ਜੋੜਾ है ਲੋੜਾ ਲੈ ਜੋ ਪਰ ਜਿਹੜਾ ਹੈਗਾ ਬੇਈਮਾਨ ਜਿਹੜੀ ਆ ਤੱਕਾ ਸ਼ਾਇਰ ਹੋਰ ਬੁਰਾ ਕੰਮ ਜਿਹਦਾ ਹੋ ਗਿਆ ਉਹਨੂੰ ਡੜਦਾ ਨਾ ਪੁੱਠਾ ਇਹ ਤਾਂ ਵੀ ਨਹੀਂ ਤਾਂ ਸਾਡੀ ਗੱਲ ਲੋੜ ਤੋਂ ਵੱਧ ਕੀ ਕਰੂ ਕੋਈ ਲੈ ਜਾ ਕੇ ਜਿਹੜੇ ਬ੍ਰਾਹਮਣ ਸੀ ਜਾਂ ਸੰਤ ਸੀ ਜਿਨ੍ਹਾਂ ਦਾ ਧਰਮ ਦੇ ਵਿੱਚ ਲੱਗੇ ਦੋਨ ਕੋ ਧਰਮ ਜਿੰਨਾ ਪੈਸਾ ਮਰਜੀ ਔਖਲਾ ਖਰਨਾ ਜੇ ਨਾ ਮਰਜ਼ੀ ਖਰਚ ਕਰੋ ਘੋੜੇ ਹਾਥੀ ਤੇ ਚੜ ਕੇ ਜਾਓ ਪੈਦਲ ਨਾ ਜਾਓ ਰਾਖ ਲੈ ਲੋ ਪਰ ਗੱਲ ਸੱਚ ਦੀ ਕਰੋ ਝੂਠ ਦੀ ਨਹੀਂ ਕਰੋ ਲੋਕਾਂ ਦਾ ਕੋ ਫਾਇਦਾ ਵੀ ਕਰੋ ਭਲਾ ਵੀ ਕਰੋ ਰਾਬੀ ਢੀਕ ਦਸੋ ਉਦੋਂ ਦੋ ਜਿਹੜੇ ਨੇ ਉਹਨਾਂ ਨੇ ਕੀਤਾ ਤਾਂ ਕਰਕੇ ਉਹ 24 ਤਾਰਾਂ ਜੋ 10 ਤਾਰਾਂ ਜਿਹਨਾਂ ਨੇ ਆ ਕੀਤਾ ਉਹ ਬਹੁਤ ਦੇਤੀ ਜਿਹੜੇ ਜੋਦਾ ਨੇ ਨਹੀਂ ਕੀਤਾ ਜਿਸਨੂੰ ਨਹੀਂ ਰੱਬ ਦਰ ਉਹਨਾਂ ਨੂੰ ਮੌਤਾ ਨਹੀਂ ਦਿੱਤੀ। অবতারਾਂ ਕਿੰਝ ਕੀਤੀ ਨਹੀਂ ਹੁੰਦੀ। ਅਸੀਂ ਉਹਨਾਂ ਨੂੰ ਬੇਗਿਆ ਤਾਂ ਰਾਜੇ ਤੇ। ਨੇ ਦਾਅਵਾ ਕਰਉਂਦੇ ਹਾਂ ਉਤਾਰੀ ਕਹਿ ਕੇ। অবতারਾਂ ਨਾਲ ਦੀ ਤੁਲਨਾ ਕਰਤੀ অবতার ਦੇ ਲੈ ਕੇ ਦੀ। অবতার ਹੋਇਆ ਜਿਹੜਾ ਪਰਪਕਾਰ ਕਰੇ ਜਿਹਦਾ ਕੰਮ ਹੋਵੇ ਪਰਪਕਾਰ। ਰਾਜਾ ਦਾ ਕੰਮ ਸਾਰਿਆਂ ਦਾ ਆਸਰਾਉਣ ਦੇ ਵਿੱਚ ਫਿਰ ਉਹ ਪਾਕਸਾਂ ਆਪਣਾ ਕੇ ਉਹ ਕਹਿੰਦਾ ਵੀ ਤੁਸੀਂ ਪ੍ਰਚਾਰ ਕਰੋ ਸਾਡਾ ਮੈਂ ਸਾਈਡ ਨੂੰ ਬੈ ਕੀਤਾ ਦੋਹਾਂ ਲਈ ਦਿੱਤਾ ਉਹਦੀ ਕਹਾਣੀ ਹੋਰ ਬਣੀ ਬੈਠੇ ਨਹੀਂ ਪੜ ਸਮਾਦਾ ਉਹਦੀ ਕਹਾਣੀ ਹੋਰ ਬਣੀ ਬੈਠੇ ਨਹੀਂ ਦੇ ਮਿਸਗਾਈਡ ਫੰਡ ਦੇ ਗੱਲ ਰਹੀ ਸੀ ਬੰਦ ਆ ਪੜਨ ਦੇ ਕਾਲ ਐਸੇ ਜਿਹੜਾ ਜੁਗਾਂ ਦੇ ਨਾਮ ਤੋਂ ਲਈ ਕੋ ਆ ਪੜਤ ਦਾਨ ਕਰਨਾ ਕਰਨਾ ਲੈਣਾ ਸੀ ਉਹ ਵੀ ਦੱਸਿਆ ਉਹ ਕਹਿੰਦਾ ਮੈਂ ਇੰਨਾ ਹੀ ਦੇ ਅਸਲ ਤਾਂ ਪੜਤ ਨੂੰ ਦਾਨ ਦੇਣ ਵਾਸਤੇ ਇਕੱਠੇ ਕੀਤੇ ਤੇ ਕੋਈ ਤੇ ਲੁਕਾ ਦੇ ਉਹਦਾ ਬਾਅਦ ਹੀ ਪਤਾ ਲੱਗਿਆ ਉਹ ਚੱਗੀ ਕੇ ਸੁਨ ਰਾਜਾ ਹੁੰਦੀ ਉਹ ਆ ਗਿਆ ਵੀ ਉਹਕਾਰ ਹੋ ਗਿਆ ਜਾਂ ਹੈਲੋ ਹੋ ਗਿਆ ਹੰਕਾਰੇ ਹੋ ਗਿਆ ਕਹ ਲੋ ਯਾਨੀ ਉਹ ਵੀ ਹਕਾਰ ਪਹਿਲਾਂ ਹੋ ਗਿਆ ਗਿਆਨ ਤੇ ਬਿਨਾਂ ਲੱਗਿਆ ਸੀ ਜਦੋਂ ਕੰਮ ਕਰਨਾ ਫਾਰਸਨਾਦ ਉਹ ਗਿਆਨ ਤੇ ਬਿਨਾਂ ਤੇ ਨਾਲ ਆਪਣੀ ਜਿਹੜਾ ਜਣੀ ਜਿਹੜੀ ਆਪਣੀ ਟਾਂਕਲ ਸੀ ਉਹਨੂੰ ਵਰਤਨ ਲੱਗਿਆ ਸੀ ਨੇਕ ਕੰਮ ਵਾਸਤੇ ਪਰ ਦੇਖੋ ਇਹ ਕੰਮ ਆਪਣੀ ਗੁੱਦੀ ਤਾਂ ਫਿਰ ਉੱਥੇ ਆਪਣੀ ਗੁੱਦੀ ਵਰਗਾ ਜੀ ਬਣ ਫਿਰ ਆਇਆ ਉਹਦਾ ਹੰਕਾਰ ਉਹ ਵੀ ਕੋਈ ਐਸਾ ਰਾਜਾ ਹੈ ਜਿਹੜਾ ਮੈਂ ਨਹੀਂ ਜਿੱਤਿਆ ਇਹ ਸਵਾਲ ਦੇ ਜਵਾਬ ਚ ਫਸਿਆ ਕਰਦਾ ਜੇ ਜਵਾਲਾ ਪੈਦਾ ਹੋਣਾ ਉਹ ਰਾਜਾ ਦਾ ਮਹਾਰਾਜ ਦੀ ਸਵਾਲ ਸਵਾਲ ਲੱਕ ਉਹਦਾ ਦੰਤ ਤੋੜਨਾ ਰਾਜਾ ਉਹਨੇ ਲੈ ਜਾਣਾ ਸੀ ਉਹ ਦੰਤ ਕੱਢ ਦੇਣਾ ਸੀ ਕਿਉਂ ਉਹਨੇ ਦਾਦੀ ਕੀਤਾ ਤੱਕ ਨੂੰ ਦੇ ਦਿੱਤਾ ਸਾਰਾ ਗਰੀਬ ਲੋਕ ਵੰਡਦਾ ਇਕ ਤੌਹਦਾ ਜੋ ਸਾਡਾ ਜੋ ਸ਼ਾਸਤਰ ਲਿਖਿਆ ਹੈ ਜੀ ਯਾਕੋਗਰ ਉਹਦੀ ਕੋਈ ਪਰਦਾ ਭੁਲੇ ਹੋਇਆ ਸਾਰਾ ਕਰਦੇ ਨੇ ਹਰ ਹਰ ਜਨ ਕੇ ਮਾਲਕ ਜੀਨਾ ਹਰ ਸਮ ਜਨ ਕੋ ਆਪੁਰਬ ਤੋਂ ਕਹੀ ਹੈ ਗੱਲ ਇਹ ਇਥੇ ਕਹਿਆ ਹਰ ਹਰ ਜਨ ਕੋ ਮਾਲਕੀ ਦਿੱਤ ਜਿਹੜਾ ਜਨ ਹੋਊਗਾ ਉਹੋ ਜਨ ਜਿਆਦਾ ਆਪਣਾ ਮਾਣੂ ਜਿਤ ਰਿਹਾ ਹੈ ਪਾਰਸਮਾਥ ਉਹ ਦਾ ਫਿਰ ਧੰਨ ਉਹ ਤਾਂ ਲੁਕਾਉਂਦਾ ਤਾਂ ਵੱਲ ਲੱਗਿਆ ਉਹ ਕਹਨ ਉਹ ਤਾਂ ਝੂਠਾ ਫਿਰ ਤੇਰੇ ਕੋ ਹੈ ਕੀ ਦੀ ਤੇਰੇ ਕੋ ਮਨ ਜਿੱਤਨ नहीं। ਤਾਂ ਹੈ ਦੀ ਕਿਆਨ ਦਾ ਬੰਦਾ ਬੁੱਲ ਰਹਿੂਗਾ ਉਹ ਨਹੀਂ ਕਰੇ ਕੋ ਹੁੰਦਾ ਤਾਂ ਤਾਂ ਨਹੀਂ ਦੀਗਾ ਹੁਣ ਜਿੱਤ ਫੈਨਾ ਉਹਦਾ ਬਹਾਲ ਹੈ ਦਾ ਮਨ ਜਿੱਤਣ ਵਾਸਤੇ ਦੂਆ ਦਾ ਮਨ ਤੇ ਤਲਬਤ ਦੂਆ ਦਾ ਵੀ ਮੰਨਦੀ ਜਿੱਤੇ ਆ ਹੈ ਦੂਆ ਦਾ ਦੁਆਗੇ ਜਿੱਤੇ ਉਹ ਦਿੱਤੀ ਜੋ ਦੂਆ ਮੰਨ ਤੇ ਪੈਰ ਤਨੇ ਜਿਤਨਾ ਦਾ ਧੁਖੇ ਦਾ ਵੀ ਪਰ ਪ੍ਰੇਮ ਨਾਲ ਜਿਤਨਾ ਭੈ ਨਾਲ ਨਹੀਂ ਜਿੱਤ ਫਰਕ ਜਿਤਨਾ ਦਾ ਧੁਖੇ ਦਾ ਵੀ ਬਣਨਾ ਕਿ ਆਪਣਾ ਜਿੱਤ ਲੈ ਜਗ ਹੈ ਜਗ ਜੀਤ ਦਬਨ ਲੋਕਾਂ ਦੇ ਮੰਨ ਤੇ ਪਰ ਕਾਹ ਦੇ ਨਾਲ ਜਿਤਨਾ ਪ੍ਰੇਮ ਨਾਲ ਜਿਤਨਾ ਪਿਆਰ ਨਾਲ ਜਿਤਨਾ ਰਾਜਾ ਪਿਆਰ ਨਾਲ ਜਿਤਨਾ ਪ੍ਰੇਮ ਨਾਲ ਜਿਤਨਾ ਦੋਗਲਾ ਨਹੀਂ ਹੁੰਦਾ ਕਦੇ ਬਗਾਵਤ ਨਹੀਂ ਕਰਦਾ ਪਿਆਰ ਨਾਲ ਜੇ ਕਹਦਾ ਦੇਖਦਾ ਰਹਿੰਦਾ ਜਦ ਮੌਕਾ ਮਿਲ ਗਿਆ ਜਦ ਬਗਾਵਤ ਕਰ ਦਿੰਦਾ ਉਹ ਤਾਂ ਵਿਸਪੋਰਟ ਕਦੇ ਵੀ ਹੋ ਸਕਦਾ ਹੈ ਵਾਲੇ ਕੋਲ ਜਿੱਥੇ ਵੀ ਵਿਸਪੋਰਟ ਕਦੇ ਵੀ ਹੋ ਸਕਦਾ ਹੈ ਉਹਦਾ ਇੱਕ ਮਤਲਬ ਤੂਫਾਨ ਤੋਂ ਪਹਿਲੀ ਸ਼ਾਂਤੀ ਹੁੰਦੀ ਜੇ ਜਿਹੜਾ ਰਾਜ ਹਮਸਾਣਾ ਬੜਾ ਧਿਆਜਾ ਰਾਜ ਤੂਫਾਨ ਤੇ ਮਦਦ ਤੂਫਾਨ ਗੋਪਤੋਂ ਦਾ ਸ਼ਾਂਤੀ ਪ੍ਰਗਟ ਹੁੰਦੀ ਜੇ ਫਸੋ ਦਾ ਵਿਰੋਧ ਵਿੱਚ ਹੈ ਗੋਲਾ ਬਹਿਗਾ ਚੁੱਪਚਾਪ ਹੈ ਅਜਾਦਾ ਜਰਾ ਕਾ ਕਪੈਗੀ ਫੇਰ ਤਰ੍ਹਾਂ ਗੂਬੇਸ਼ ਕਿ ਸਾਂਤੀ ਜਿਹੜੀ ਵਿੱਚ ਵਿੱਚ ਗੋਲਾ ਬਣਿਆ ਤੇ ਕੀ ਕਰਦਾ ਉਹ ਗੋਲਾ ਤਾਂ ਹੈ ਆਈ ਦਿੱਤੇ ਹੈ ਨਾ ਉਹ ਗੋਲੇ ਹੁੰਦੇ ਨੇ ਅੰਦਰ ਸਾਰਿਆਂ ਨੇ ਬਰੂਧ ਫੜੇ ਜਿਨ ਤਾਰੀ ਪੈ ਤੇ ਫੜਦੇ ਨੇ ਲੋਕ ਫੜਦੇ ਹੀ ਰਹਿੰਦੇ ਨੇ ਫੜੀ ਹਰ ਹਰ ਜਨ ਕੇ ਉਠ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣ ਹਰ ਹਰ ਜਨ ਕੇ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਠੀਕ ਗੱਲ ਹੋਈ ਬਈ 47 ਹਰ ਹਰ ਜਾਣ ਕੇ 47 ਅਕਸਰ ਦੇ ਵਿੱਚ ਜਿਹੜਾ ਹਟਾਣਾ 36 ਵਾਲੀ ਓਟ ਹੈ ਕਾਲ ਤੋਂ ਵੀ ਦੀ 47 ਓਟ ਹੈ 36 ਓਟ ਹੈ ਇਹ ਕਾਲ ਤੋਂ ਦੀ ਹਾਂ ਪ੍ਰਤਾਪ ਤੇ ਨਹੀਂ ਤਾਂ ਕੋਟਨਾ ਕੋਟਨਾ ਛੋਟਨਾ ਤੋਸਾ ਆ ਬਾਹਰ ਕੱਟ ਤੇ ਖਿਆਨਾਂ ਕਾ ਪੋਣਾ ਨਾ ਤੇਰੀ ਕਿਲੇ ਦੀ ਓਟ ਬਣਾਈ ਹੋਈ ਕਾ ਪੋਣੀ ਐ ਦਿਵਾਰ ਦੀ ਨਾ ਤੇਰਾ ਕੋਟ ਕਿਲਾ ਕਾ ਪੋਣਾ ਐ ਨਾ ਤੇ ਨੂੰ ਛੋਟਾ ਫਿਰ ਆ ਵੀ ਚਲੇ ਮਾਫ ਕਰਦੀ ਐ ਇਹਨੂੰ ਬੜਾ ਦਾਨਪੁਣ ਵੀ ਕੀਤਾ ਚੰਗੀ ਗੱਭ ਵੀ ਕੀਤਾ ਨਾ ਤੋਸਾ ਤੇਰੇ ਖੇ ਨਾਲ ਕਾ ए ता सतानी ओड है फिर ओ छड़ के इन न ओवे ओ कहंगा वे मन कोड़ो हार गया मन कोड़ो नहीं हारया सब काल कोड़ो हारया है मन कोड़ो हारया होया अदमु काल कोड़ो हारया होया काल रूप है मन जिगना ए पता लग ज्यूगा वे मान काल रूप है ਫੇਰ ਬੁੱਧੀ ਮਨ ਨੂੰ ਛੱਡਦੀ ਹੈ ਵੱਲ ਨੂੰ ਛੱਡਦੀ ਹੋਈ ਦੀ ਕਵੇਂ ਛੱਡ ਦੂ ਜਦੋਂ ਪਤਾ ਲੱਗ ਜੂ ਨਾਸ ਗਏ ਤਾਂ ਹੈ ਇਹਦਾ ਮਨ ਬੱਪੜਿਆਂ ਨੂੰ ਫੜਦਾ ਸਾਰੇ ਨੂੰ ਮਾਰੇ ਚੰਗਾ ਬੇੜੀ ਤੋਂ ਬੇੜੀ ਤੋਂ ਮਰਦੇ ਮਨ ਦਾ ਹੀ ਆਇਆ ਇਸੇ ਚ ਕਲਪਨਾ ਹੈ ਕਲਪਨਾ ਦਾ ਹੀ ਹੈ ਹੋਰ ਹੈ ਕੀ ਹੈ ਇਹ ਉਹਦਾ ਮਾਰਨ ਹੈ ਜੇ ਇਹ ਨਾ ਮਾਰਿਆ ਹਤਾ ਦੂ ਬਰਿਆ ਇਹ ਅਕਾਲ ਵਾਸ ਕਰਨਾ ਇਹ ਅਕਾਲ ਵਾਸ ਕਰਨਾ ਮਾਨ ਵਾਸ ਕਾਲ ਵਾਸ ਕਰਨਾ ਹੋਰ ਕੀ ਹੈ ਕਾਲ ਕਲਪਨਾ ਜਾਂ ਕਲਪਨਾ ਨੂੰ ਕਾਲ ਕਹਿੰਦਾ ਕਲਪਨਾ ਮਾਨ ਹੈ ਹੀ ਆਇਆ ਸੀ ਕਾਮ ਰੂਪ ਵੀ ਹੈ ਹੋਰ ਕੀ ਹੈ ਸਾਰੀਆਂ ਬਿਮਾਰੀਆਂ ਦੇ ਜੜ ਇਹੀ ਹੈ ਉਨਾ ਜਰ ਹੈ ਬਿਮਾਰੀ ਨੂੰ ਜਿੰਨਾ ਜਰ ਹੈ ਚ ਪਰਬ ਉਸ ਪਰ ਬੁਦਾਇ ਕਰਦੇ ਫਿਰ ਆਪੇ ਛੱਡ ਦਿੰਦੇ ਗੱਪ ਉਸੇ ਫਿਰ ਆਪੇ ਛੱਡ ਦਿੰਦੇ ਇਹ ਉਹ ਪੱਦਰ ਵੀ ਆ ਇਹਨੂੰ ਪੱਦਰ ਵੀ ਕਹਿੰਦੇ ਨੇ ਉਹਦੇ ਵਿੱਚ ਹਿੰਦੀ ਚ ਉਹ ਪੱਦਰ ਵੀ ਨੂੰ ਗੁਰਵਾਦੀ ਕਹਿਣ ਲੱਗੇ ਹੁਣ ਅੱਜ ਕੱਲ ਇਹਨੂੰ ਗੁਰਵਾਦੀ ਕਹਿੰਦੇ ਨੇ ਪਿੱਛੇ ਉਪ ਵੀ ਕਹਿੰਦੇ ਨੇ ਉਹ ਪੱਦਰ ਵੀ ਥੋੜਾ ਜਿਹਾ ਐ ਹੋ ਜਾਂਦਾ ਵੀ ਅਮਨ ਬਾਦ ਆਪਣੀ ਅਬਰ ਬਗੜਨਾ ਉਸ ਅਤਵਾਦੀ ਯਾਦ ਹੋ ਜੇਗਾ ਤਾਂ ਐਸਾ ਤਮਾਕਾ ਸਾਹਣੇ ਜੀ ਰਾਜ਼ੀ ਨਹੀਂ ਮਰ ਜਾਣਾ। ਉਹ ਚੈਨਾ ਰੱਖਦਾ। ਹਾਂਜੀ। ਹਰ ਹਰ ਜਨ ਕੇ ਉਸ ਤਾਣੀ ਹਰ ਪ੍ਰਤਾਪ ਮੈਨੂੰ ਪਤਾ ਸੀ ਪ੍ਰੋਬਲਮ ਆ ਤਾਂ ਚਾਹੀ ਕਰੇਗਾ। ਹਰ ਹਰ ਜਨ ਹਰ ਜਨ ਜਿਹੜਾ ਹਰ ਜਾਣਾ ਉਹ ਹਰ ਦੀ ਓੜ ਤੇ ਜਾਂਦਾ ਪਿੱਛੇ ਜਾਂਦਾ ਹਰ ਤੇ ਐਵੇਂ ਨਹੀਂ ਜਾਂਦਾ ਪਾਣੀ 'ਚ ਰਹਿੰਦਾ ਆਪਣਾ ਪਾਣੀ ਬੂਰੇ ਹੁੰਦਾ ਆਪਣੇ ਪਾਣੀ ਵਾਲਾ ਬੂਰੇ ਹੁੰਦਾ ਗੁਰਦੇ ਬਾਣੀ ਆਲਾ ਆਪਣੇ ਪਾਣੀ ਜਨ ਵਾਲਾ ਬੂਰੇ ਹੁੰਦਾ ਸਰਦਾਰ ਜਿਹੜਾ ਬਣ ਸਰਦਾਰ ਬਣੋ ਅਗਲਾ ਕਹਿੰਦਾ ਵੀ ਭਾਈ ਤੂੰ ਬੜਾ ਬੂਰੇ ਥੇ ਹਰ ਹਰ ਜਨ ਕਾ ਵੋਟ ਸੁਦਾਣੇ ਹਰ ਜਨ ਦੇ ਉਹਦੇ ਬਾਅਦ ਹਰ ਸ਼ਕਤੀ ਹਾਲੀ ਵੋਟ ਉਹ ਆਪਣੇ ਆਪ ਦੇ ਕਿਸੇ ਦੇ ਹਰ ਕਈ ਜਨ ਬਣ ਗਏ ਤਾਂ ਉਸ ਚਲਦੀ ਹਰ ਜਨ ਕਹਿੰਦੇ ਯਾਰ ਉਹ ਰੇਡਰ ਹਾਲੀ ਵੋਟ ਜੋਗੇ ਹਰ ਜਨ ਖੋਗੇ ਟਾਰਗੇਟ ਹੱਲੂ ਵੀ ਕੋਈ ਕਰ ਸਕਦਾ ਕਾਲ ਹੱਲੂ ਟਾਰਗੇਟ ਨਹੀਂ ਕਰਦਾ ਕਦੇ ਹਰਦਿਕ ਵੀ ਉਹ ਲੱਗਦਾ ਦੁਆਰਤਾ ਉਹ ਹਰਦਾਨ ਦਾ ਪੁੱਤ ਹੈ ਗਾਲੋ ਹਾਂ ਨਾ ਜਿੰਨੇ ਜੰਮਾ ਹਾਂ ਥੋੜਾ ਦੂਆ ਪੀ ਲੈ ਲੋਕ ਆ ਗਏ ਦੂਆ ਪੀ ਲੈ ਬਸ ਲੋਕ ਆ ਉੜ ਚ ਆ ਗਏ ਪੁਦੀਨਾ ਹੀ ਉਹਨਾਂ ਉੜ ਚ ਆਇਆ ਦਿਨਾਈ ਨਹੀਂ ਇਹ ਮਨ ਸੁਣਨਾ ਰੁਕਾ ਰੁਕਾ ਜਦ ਮਨ ਸੁਣ ਹੋ ਗਿਆ ਤੇ ਵਿੱਚੇ ਸਮਾ ਗਿਆ ਲੋਕ ਆ ਹੱਲ ਹੈ ਕਿ ਆਪ ਰਹਿ ਗਈ ਨਹੀਂ ਨਾ ਲਗਿਆ ਉੱਥੇ ਮੈਂ ਕਿਹਾ ਸਿਰ ਨਹੀਂ ਲੁਕਦਾ ਸੁਣ ਹੋ ਕੇ ਸੁਣ ਹੋਵੇ ਤਾਂ ਰੁਕੇ ਸਹਿ ਹੋਗੇ ਨਾ ਮਨ ਸੁਣਨਾ ਅੱਛਾ ਇਹ ਮਨ ਸੁਣਨਾ ਇੱਦਾਂ ਲੱਗਣਾ ਨਾ ਜਾਂ ਸੁਣਣ ਦੀ ਤਾਂ ਲੁਕਦਾ ਵੀ ਨਹੀਂ ਸੁਣੋ ਕੇ ਲੁਕਦਾ ਨਹੀਂ ਸੁਣ ਲੋ ਜੇ ਤਾਂ ਰੁਕ ਜੂ ਇਸਾ ਜੋ ਫਤਹਾ ਜਿਹੜਾ ਆਪਣਾ ਭਾਣ ਤਿਆਰ ਕਰੀ ਫਤਹਾ ਸਹਾਇਜ ਇਹ ਸਹਾਇਜ ਕਰਕੇ ਹੀ ਤਾਂ ਸਭ ਕੁਝ ਕਰ ਲੈਂਦਾ ਕੋਈ ਸਹਾਇਜ ਬਿਨਾ ਕੁਝ ਨਹੀਂ ਹੋ ਸਕਦਾ ਹੂੰ ਵਾਲਾ ਸਕਦਾ ਸਹਾਇਜ ਵਾਲਾ ਹੀ ਕੁਝ ਕਰ ਸਕਦਾ ਤਾਂ ਹੀ ਇਹਨਾਂ ਨੂੰ ਜਾਗਰਤ ਮੰਨ ਲਿਆ ਅਸੀਂ ਇਹਨੂੰ ਅਸੀਂ ਸੁਣਦਾ ਸੀ ਉਹ ਨਹੀਂ ਮਿਲਦੇ ਜਾਗਰਤ ਹੈ ਵੀ ਪਰ ਸੁਪਨੇ ਵਿਚਾਰ ਲੈ ਸੁਪਨਾ ਜਾਗਰ ਦਾਡ ਜੇ ਜਾਗਰ ਤੋਬੇ ਤੇ ਧੋਖਾ ਕਿਵੇਂ ਹੋਏ ਜਾਗਰ ਦਾਜ ਨੂੰ ਧੋਖਾ ਨਹੀਂ ਹੁੰਦਾ ਜਾਗਰਤ ਵੀ ਸੁਪਨਾ ਹੀ ਹੁੰਦਾ ਹਰ ਗੱਲ ਦੇ ਕਹਿਣਾ ਕਿ ਰੌਂਡ ਹੈ ਐਵੇਂ ਥੋੜੀ ਜਿਹੀ ਚਰਚਾ ਕਰਨ ਬੈਠਣਾ ਅਗਲਾ ਉੱਥੇ ਦਾ ਲੱਭਦਾ ਨਹੀਂ ਪਹਿਨਾ ਹਰ ਵਾਰ ਉਹ ਸੱਤ ਕੁੰਤੀਆਂ ਪੰਨੀਏ ਕਿ ਕੱਲ ਗੱਲ ਤੇ ਫੇਰ ਫੋਕਸ ਕੇ ਉਹ ਕੇ ਮਣੇ ਕਾਲ ਰੂਪ ਹੈ। ਹੋਰ ਕੀ ਹੈ ਸੱਤ ਕੇ ਰੂਸ਼ੀ ਬਾਦੀ ਤਾਂ ਮੇਰਾ ਪੱਕਾ ਹੋ ਗਿਆ ਉਹਨਾਂ ਨੂੰ। ਇਕੱਠਾ ਫੋਕ ਰੋ ਗਿਆ ਚਾਰ ਆਪਸ ਲਾਈਟ ਬੈਠੀ ਜਾਨਾ ਚਾਹ। ਅਗਰ ਨਾ ਹਰ ਜਨ ਕੇ ਹਰ ਪ੍ਰਤਾਪ ਜਨ ਅਵਰ ਹਰ ਪ੍ਰਤਾਪ ਸਰਦਾ ਪ੍ਰਤਾਪ ਜਾਣਿਆ ਹੋਰ ਕਿਸੇ ਨੂੰ ਕੁਝ ਨਹੀਂ ਸਮਝੇ। ਦੇਵੀ ਦੇਵਤਿਆਂ ਤੋਂ ਹੋਰ ਕਿਸੇ ਤੋਂ ਦੁਨੀਆ ਤੇ ਕਿਹਨਾਂ ਚੀਜ਼ ਤੋਂ ਪ੍ਰਭਾਵ ਤੇ ਹੀ ਦੀ। ਸਰਦਾ ਪ੍ਰਤਾਪ। ਦੌਰ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੋਂ ਪ੍ਰਭਾਵਤ ਹੋਣੀ ਪ੍ਰਭਾਵਤ ਹਾਂ ਤੁਮਨੇ ਕਿਸੇ ਤੋਂ। ਉਹਦਾ ਬੰਦਾ ਇਹ ਦਾ ਜਿਹੜਾ ਬੰਦੇ ਦਾ ਬੰਦਾ ਜਿਹੜਾ ਹੁੰਦਾ ਉਹ ਮੂਰਖ ਹੁੰਦਾ। ਸਭ ਕੁਝ ਆਪਣੂ ਸੋਪਿਆ ਜਾ ਤੇਰਾ ਬੱਦਾ ਇਹ ਆਦਮੀ ਵਾਲੀ ਨੀ ਹਰਦੀ ਅਸੀਂ ਆਪਣਾ ਆਪਣੇ ਨਾਲ ਆਪਣੇ ਨੂੰ ਐਕਸੈਪਟ ਕਰਦੇ ਸਾਨੂੰ ਕੋਈ ਇਤਰਾਜ਼ ਨਹੀਂ ਦੂਜੇ ਦਾ ਖੱਬ ਸਭ ਹੈ ਜੇ ਕੋਈ ਕਹੇ ਰਾਮਚੰਦਰ ਇਹ ਹੈ ਉਹ ਹੈ ਉਹ ਨੂੰ ਨਹੀਂ ਚਾਹੀਦਾ ਅਸੀਂ ਕਹਿੰਦੇ ਬਿਲਕੁਲ ਨਹੀਂ ਬਣਨਾ ਚਾਹੀਦਾ ਪਰ ਜੇ ਕਹੇ ਗੁਰੂ ਗੋਬਿੰਦ ਸਿੰਘ ਵੀ ਨਹੀਂ ਬਣਨਾ ਚਾਹੀਦਾ ਫਿਰ ਤਕਲੀਫ ਹੋਦੀ ਹੈ ਫਿਰ ਸੁਣਨ ਲੱਗ ਜਾਂਦਾ ਜੇਕਰ ਉਹ ਵੀ ਆ ਦੇ ਨਾ ਇਹ ਨਹੀਂ ਨਾ ਇਹ ਉਹ ਨਹੀਂ ਦੇ ਆ ਦੇ ਫੇ 6 ਬੰਨਣਾ ਬਣਾਉਣਗੇ ਫਿਰ ਕਾਹਦੇ ਬੰਨਣਾ ਜਦ ਆਪਰੇ ਘਰੋਂ ਆਉਂਦੀ ਹੈ ਨਾ ਫਿਰ ਪਤਾ ਲੱਗਦਾ ਸੱਚ ਦਾ ਆਪਣਾ ਘਰੋਂ ਝੂਰੀ ਹੋਈ ਜਦ ਆਉਂਦੀ ਹੈ ਫਿਰ ਪਤਾ ਲੱਗਦਾ ਜਦ ਦੂਜੇ ਨੇ ਜਾਂਦੇ ਉਹਨਾਂ ਦੂਜੇ ਨੇ ਕਿਹਾ ਬ੍ਰਹੰਤਰ ਆਪਣੇ ਲਈ ਆਕਰ ਬੋਲੀ ਵਰਦਾਇਤ ਕੋਵੇ ਦੁਨੀਆ ਪਰ ਨੂੰ ਤੁਸੀਂ ਕਿਹਾ 10 ਹੁਦੂ ਦੇ ਵਿੱਚ ਕਿਹਾ ਆਜ ਕਿਹਾ ਤੁਸੀਂ ਆਪਣੇ ਆਪ ਨੂੰ ਛੋੜ ਕੇ ਬੁਲਾ ਲਿਓ ਪਸ ਅਸਲ ਦੇ ਵਿੱਚ ਦੂਏ ਸਾਰੇ ਵਿਚੋੜਨੇ ਤੇ ਦੂਏ ਵੀ ਵਿਚੋੜਨੇ ਤੇ ਇਹ ਤੁਹਾਨੂੰ ਨਹੀਂ ਰੋਣਾ ਸੀ ਸਾਰੇ ਦੂਏ ਧਰ ਬਚਾ ਕੇ ਇੱਕ ਤਾਂ ਕਹਿੰਦੇ ਵੇਦੇ ਬੰਲਾ ਸਰਦੀ ਨੂੰ ਸਾਨੂੰ ਨਹੀਂ ਸਕਦਾ ਰਾਜ ਦਾ ਮੈਂ ਪੰਜਾਬ ਦਾ ਇਦਾਂ ਨਹੀਂ ਹੋਣਾ ਕਿ ਮੈਂ ਕਿਲੇਸ ਪੈ ਗਿਆ ਤੇ ਗੱਲਾਂ ਕਰਦੇ ਜੇ ਤਾਂ 5 ਸਾਲ ਕਿਲੇਸ ਵੀ ਵੱਲ ਪੈ ਚੁੱਕਿਆ ਪਹਿਲਾਂ ਪੰਜਵੇਂ ਬਾਝੋਂ ਜੇਲ ਕੀਤਾ ਫਿਰ ਨੌਵੇਂ ਨੂੰ ਜੇਲ ਕੀਤਾ ਫਿਰ ਉੱਤਰ ਅੰਮਲ ਸਰ ਕਾਦੇ ਵਾਸਤੇ ਆਮ ਵਿਰੋਧ ਸੁਝਾਤਾ ਹਰ ਵਿਰੋਧ ਕਰਕੇ ਹੋਰ ਕਾਦੇ ਕਰਦੇ ਇਹ ਕਹੇ ਨੂੰ ਚੱਲਦਾ त्याग ना करों और अभी भी त्याग देने लोग येड़ी चीजो गल कर जैसी गिराना रोटी खाइए जाने ना पड़ गए है सरकार भी कहते हैं सर दिए गलान पीछे रखो पर ओड़ीया पीछे रखना नहीं गलना ने है ये ही नहीं कदा ये जे तरबड़ी है ता दुनिया च करप्शन हो तक्केशाही है बुराई होता है ये जिना बुराई करनी है तो कैषाई करनी है वो ये नु बर्दाश्त नहीं करते। जेड़ा तबका ऊ तेज़ी क्षत्रिय थी ब्राह्मण थी वो क्यों बनता है डर उठू भाई। हरिणता बनते चलो तडीमे ते। धीमे जात था तब बुद्धि हो। जेड़े ऊपर ना होगा ते बनते। उन्होंने विरोध की तक। करदे ਅਰ ਉਹਨਾਂ ਜਿਵੇਂ ਨੇ ਨਗਰੋਧ ਕੀਤਾ ਜਿਹੜੇ ਸਿਆਣੇ ਤੇ ਛੱਡੇ ਤੇ ਉਹਨਾਂ ਨੇ ਕੀਤਾ ਵੀ ਹੈ ਜੁਰੋਧ ਵਦੀ ਦਾਸ ਵੀ ਬ੍ਰਾਹਮਣ ਆਹੋ ਸਤੀ ਦਾਸ ਵੀ ਬ੍ਰਾਹਮਣ ਹੈ ਇਹ ਕਦੇ ਜੇ ਨੇ ਸਾਰੇ ਸਿੱਖਾ ਬ੍ਰਾਹਮਣ ਜੋ ਵੀ ਨੇ ਛਤਰੀਆ ਜੋ ਛਤਰੀਆ ਤਾਂ ਗੁਰੂਏ ਸੀ ਜੱਟਾਂ ਜਿਹੜੇ ਸਾਰੇ ਹੀ ਪਰ ਇਹ ਜਿਹੜਾ ਚਿੰਤਨ ਦਾ ਬਿਰਵਾ ਉੱਧਰ ਇਹ ਜਿਹੜਾ ਢਾਕ ਪਲਾਸੇ ਉੱਧਰ ਸਭ ਪੱਕੇ ਸਿੰਬਲ ਦਾ ਰੱਖੋ ਔਰ ਜਿਹੜੇ ਬੜ ਬੜੇ ਰੱਖੇ ਨੇ ਨਾ ਹੋਰ ਉਹ ਨਹੀਂ ਉੱਤੇ ਜਿਹੜਾ ਕੋਈ ਨੀ ਪੁੱਛਦਾ ਉਹ ਨੂੰ ਇਹ ਬਰਾਬਰ ਸਮਝਦਾ ਨਾ ਦੋਆਂ ਦੇ ਕੋਈ ਯਾਦਦੰਦ ਕਰਕੇ ਉਹ ਢਾਕ ਪਲਾਸ ਜਿਹੜਿਆ ਜੰਨ ਉਹ ਕਹਿੰਦਾ ਜੰਨ ਰੱਖੋ ਵਰਵਾ ਪਲਾ ਬੇੜੇ ਉਹ ਢਾਕ ਪਲਾਸ ਉਹ ਕਹਿੰਦੇ ਉਹ ਵੀ ਚੱਗਾ ਜਾਇਆ ਅਰਦਾਸ ਪਲਾਸ ਕੋਈ ਬਹੁਤਾ ਕੀ ਦਿੱਖਤ ਨਹੀਂ ਹੈ ਬਹੁਤ ਜ਼ਿਆਦਾ ਟੌਪ ਕਲਾਸ ਬੰਦੇ ਨਹੀਂ ਆਉਂਦੇ ਜਿਹੜਾ ਹਾਂ ਹੰਕਾਰ ਹੁੰਦਾ ਤੇ ਹੰਕਾਰ ਤੇ ਪ੍ਰਭਾ ਹਾਂ ਇਹਦਾ ਕਾਸ਼ ਗੇਰੀ ਦੀ ਜਾਂਦੀ ਕਿ ਸਾਨੂੰ ਹਾਂਜੀ ਕੋਟ ਕੋਟ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਦੇਖੋ ਕੋਟ ਕੋਟ ਜਦੋ ਹੋ ਜਾਂਦਾ ਨਾ ਨਾਮ ਰਸ ਦੇ ਵਿੱਚ ਜਾਨੀ ਉਤਪੋਤ ਰਾਜਮੈ ਸਰੀਰ ਹੈ ਸਾਡਾ ਖੂਨ ਇਹਦੇ ਵਿੱਚ ਉਤਪੋਤ ਹੈ ਜਿੱਦੋਂ ਅੱਖੀ ਸੂਈ ਮਾਰ ਲੋ ਖੂਨ ਨਿਕਲੇਊਗਾ ਉਤਪੋਤ ਹੈ ਇਹ ਸੱਚ ਮਾਰ ਲੋ ਟੱਕ ਦੇ ਰੋਥੋਂ ਨਿਕਲੇਊਗਾ ਜੀਰਾ ਪੈ ਸੀਦਲੋ ਤਾਂ ਨਿਕਲੇਊਗਾ ਤੇ ਖੂਨ ਤਾਂ ਉਤਪੋਤ ਹੈ ਫਿਰ ਤੇ ਕਿਥੋਂ ਤਾਂ ਫੈਲੀ ਹੈਗੀ ਇੱਧਰ ਹੈ ਦੀ ਇੱਧਰ ਹੈ ਦੀ ਕਿਥੋਂ ਉਤਪੋਤ ਇਹ ਸਾਰੀ ਜਗ੍ਹਾ ਹੀ ਹੋਵੇ ਚੀਜ਼ ਇਹ ਬਿੱਟੀ ਗੱਲੀਆ ਉਤਪੋਤ ਪਾਣੀ ਹੋ ਗਿਆ ਸਾਰੀ ਗੱਲੀ ਇਸ ਤਰੀਕੇ ਨਾਲ ਜਦੋਂ ਨਾਮ ਦੇ ਵਿੱਚ ਉਤਪੋਤ ਹੋ ਗਿਆ ਕੋਈ ਨਾਮ ਰਸ ਮੱਤੇ ਹਰ ਰਸ ਰਾਤੇ ਮੂਤ ਪੂਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਥੇ ਸੁੰਨ ਸਮਾਦ ਹੁੰਦਾ ਮਨੋਂ ਤੋਂ ਪਹਿਲਾਂ ਸੰਗੂਫਾਦ ਹੁੰਦਾ ਹੀ ਜਿਵੇਂ ਹੋਰ ਤਰੀਕੇ ਨਾਲ ਗੱਲ ਕਰਦੇ ਆਪਾਂ ਜੋ ਬੋਲ ਹੋਏ ਜੋ ਜੀਵ ਦੇ ਉਥੇ ਇਤੇ ਜੇ ਕਿਸੇ ਕੋਈ ਨਾਟਦਾ ਹੋਵੇ ਨਾ ਬੋਲਦਾ ਠੀਕ ਕਰਦੇ ਵੀ ਜਦੋਂ ਸ਼ਾਸਰੂ ਪਿੰਦੇ ਦੇ ਕਹਿੰਦੇ ਪਾਰਟੀ ਨਹੀਂ ਕਰ ਉਹ ਮਟੀਵਾਹੇ ਕਰਾਂ ਉਹਦੋਂ ਫਿਰ ਜਿਹੜਾ ਆਦਮੀ ਜ਼ਿਆਦਾ ਬੋਲੇ ਜਾਂ ਨਾਟੇ ਉਹਨੂੰ ਕਹਿੰਦਾ ਮੈਂ ਇਹਨੂੰ ਇਹਦੇ ਕੋਲ ਅਲੋਗਿਆ ਚਪ ਕਰਕੇ ਡੱਫਾ ਪਾਇਆ ਜਿਵੇਂ ਬਈ ਇਹੇ ਬੋਲਤੇ ਬੰਦ ਕਰ ਦੋ ਇਹਨੂੰ ਹੋਰ ਫਲਾਸੋ ਹੁਣ ਬੁੜੋਚ ਕਰ ਦੋ ਜੀ ਬਰੀ ਵਾਚੋ ਇੱਕ ਅੰਦੇ ਜਿਹੜੇ ਨਾਮ ਰਸ ਮਾਤੇ ਹੁੰਦੇ ਨੇ ਨਾ ਨਾਮ ਦੇ ਰਸ ਦਾ ਮੱਤਿਆ ਜਾਂਦਾ ਪੂਰਾ ਨਸ਼ਾ ਹੋ ਜਾਂਦਾ ਜੀ ਨੂੰ ਦੇ ਵਿੱਚ ਮਾਤਾ ਮੱਤ ਮਾਰੀ ਹੋਈ ਦੂ ਬੈਠਦੇ ਸਨ ਨਾਵ ਰਸ ਮੱਤੇ ਮੱਤੇ ਮੱਤ ਮਾਰੀ ਗਈ ਉਹਦੀ ਪੋਤ ਬੋਤ ਜਨ ਹਰ ਰਸ ਦਾਤੇ ਹਰ ਰਸ ਨਾਮ ਰਸ ਮੱਤੇ ਨਾਮ ਦਾ ਗੱਲ ਹੁੰਦੀ ਨਾ ਉਹ ਆਦੀ ਨਾਮ ਰਸ ਨੇ ਮੱਤ ਮਾਰ ਦਿੱਤੀ ਹੁੰਦੀ ਹੈ ਕਿਹੜੀ ਮੱਤ ਭਾ ਦੋ ਕਿਸਮ ਦੀ ਮੱਤ ਹੈ ਇੱਕ ਜਿਹੜੀ ਦਰਮਾਤ ਉਹ ਤਾਂ ਮਾਰਦੀ ਹੀ ਹੁੰਦੀ ਨਾਮ ਤੋਂ ਮਰ ਨੂੰ ਮਾਰ ਦਿੰਦਾ ਜਿਹੜਾ ਭਰਮਾ ਗੋਟ ਉਹ ਜਿਹੜੀ ਦੁਨੀਆ ਗਲ ਹੈ ਉਹ ਮਾਰ ਦਿੰਦਾ ਫੌਜ ਦੇ ਬਗਲ ਨੂੰ ਮਾਰ ਦਿੰਦਾ ਨਾਮ ਨੈਗੇਟਿਵ ਬਗਲ ਨੂੰ ਮਾਰ ਦਿੰਦਾ ਕਬੂਦ ਤੋਂ ਨਾ ਮਾਰ ਦਿੰਦਾ ਸਬੂਤ ਨੂੰ ਜਿਹੜਾ ਹੈ ਪਰ ਮਾਰ ਅਪਕਾਰ ਮਾਰਦੇ ਨੇ ਜੇ ਨਾਮ ਦਾ ਜਿਹੜਾ ਰਸ ਲੈਦੇ ਨੇ ਉਹਨਾਂ ਦੇ ਕਬੂਦ ਦਾ ਨਾਸ ਹੋ ਜਾਂਦਾ ਚਾ ਕਬੂਦ ਦਾ ਨਾਸ ਹੋ ਗਿਆ ਕਉਪਤਾ ਦਾ ਸਾਡੀ ਸ਼ਾਦੀ ਇਹ ਹੈ ਕਿ ਆਦਮੀ ਹੁਕਮ ਦਾ ਵਿਰੋਧ ਨਹੀਂ करता ਫਿਰ ਕਰਦਾ ਹੀ ਨਹੀਂ ਪਾਣਾ ਮਿੱਠਾ ਲੱਗਣ ਲੱਗ ਜਾਂਦਾ ਉਹ ਕਉਪਤਾ ਸਾਡੀ ਜਿਹੜੀ ਪਾਣਾ ਮਿੱਠਾ ਲੱਗਣ ਲਈ ਜਾਂਦੀ ਹੁਕਮਤੇ ਕੋਉਂਦ ਕੋਉਂਦ ਜਨ ਹੰਨ ਰਸ ਵਸਾਤੇ ਸੁਨ ਸੁਆਦ ਨਾਮ ਰਸ ਵਸਾਤੇ ਸੁਨ ਸੁਆਦ ਨਾਮ ਰਸ ਵਸਾਤੇ ਫਿਰ ਉਹ ਸੁਨ ਮਾਤ ਪਤ ਜੀਓ ਮਾਰੀ ਗਈ ਤੇ ਸੌਣ ਲਈ ਹੋ ਰਹੀ ਗੱਲ ਮਾ ਤੇਰਾ ਮਤਲਬ ਮਾਰਿਆ ਜਾਣਾ ਮੈਂ ਕਿਹਾ ਮਾਤਰ ਜਿਆਦਾ ਬੰਦੀ ਮਤ ਮਾਰੀ ਜਾਂਦੀ ਆ ਤਾਂ ਐ ਨਾ ਚਰ ਮਤਰੀ ਆ ਹਰਦਾ ਜੀ ਬੋਲਣ ਦੇ ਹਾਂ ਬੰਨ ਜਾਂ ਮਤ ਮਾਰੀ ਜਾਂਦੀ ਆ ਤਾਂ ਬੋਲਣ ਟੈਣ ਦਾ ਇਹਨੂੰ ਅਜਾਈ ਅੰਨ ਦੇ ਦੋ ਜੀ ਬੋਲ ਦੋ ਬੋਲ ਨਾ ਮਤਮ ਆਰਦਨ ਦੀਏ ਗੁਰਮਤੋ ਕਿਉਂ ਬੋਲੋਗੇ ਕੀ ਦੇ ਹਾਂ ਕੰਬੋਲੋਗੇ ਕੀ नहीं मारती। ਹੀ ਹੁੰਦਾ ਜੇ ਗੁਰਮਤ ਬੱਤ ਨੂੰ ਡਰੀ ਮਾਰਦੀ ਤਾਂ ਫਿਰ ਅਜੋ ਸਾਡੇ ਮੰਨਣ ਤੇ ਥੜਕਾ ਅਧਿਕ ਗੁਰਮਤਾ ਪੂਰਾ ਸਾਥ ਨਹੀਂ ਦੇ ਰਹੇ ਮੰਨ ਬੱਤ ਦਾ ਵੀ ਸਾਥ ਦੇ ਰਹੇ ਆ ਗੁਰਮਤਾ ਵੀ ਦੇ ਕੋਈ ਗੱਜਾਂ ਨਹੀਂ ਜੀ ਗੱਜਾਂ ਜਿੱਦ ਕਾਟਿਆ ਹੋਈ ਵਿਚਾਊਗਾ ਹਦੈ ਸਾਡੇ ਚ ਵਿਚਾਈ ਸਾਡੀ ਇਹ ਤਾਂ ਡਰਾਇੰਡੀ ਕੀਤਾ ਜਾ ਸਕਦਾ ਹਾਂਜੀ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਪ੍ਰਗਟ ਰਹਿ ਛਪੈ ਆਠ ਪਹਿਰ ਜਨ ਹਰ ਹਰ ਜਪੈ ਜਾਮ ਕੀ ਕਰਦਾ ਤੇ ਪੈਰ ਹਰਦਾ ਜਪ ਕਰਦਾ ਕੋਈ ਜਪਣਾ ਕਰਦਾ ਫੇਰ ਵੀ ਸਮਝੀਂਦਾ ਨਹੀਂ ਜਾਂਦਾ ਜੀ ਜਾਂਦਾ ਬੁਣਾ ਉੱਚੇ ਤੇ ਉੱਚਾ ਬਗਵਾਨ ਤਾਂ ਬੰਦੇ ਜਾਂਦਾ ਨਹੀਂ ਹੁੰਦਾ ਉਹ ਜਿਆਦਾ ਹੋਇਆ ਉਹ ਨਹੀਂ ਅਮਰੀਕੀਆਂ ਦਾ ਸਰਮੇ ਨਾ ਹੋਰ ਫਿਸੀ ਜਾਂਦਾ ਉਹ ਬਚਾ ਜਾਂਦਾ ਹੁੰਦਾ ਬਚਾਉਣਾ ਹੀ ਹੁੰਦਾ ਜਿੰਨਾ ਜਿਆਦਾ ਬਚਾਰੇ ਜਾਂ ਬਾਣੀ ਨੂੰ ਉਹਨੇ ਕੁਝ ਨਾ ਸਾਹਿਬ ਮੇਰਾ ਦੀਦ ਨਾ ਨਿਕਲੀ ਜਾਂਦਾ ਕੁਝ ਇਹਦੇ ਚ ਆਪਰੋ ਦੇਖ ਲਈਆਂ ਕਦੋਂ ਤੋਂ ਕਈ ਵਾਰ ਕੀਤਾ ਹੈ ਬਸੋ ਬੁਰਾ ਲੱਗਿਆ ਨਹੀਂ ਬਸ ਅਵਸਥਾ ਹੀ ਉਹ ਬੁਢਾਈ ਵਧ ਹੈ ਉਹ ਜਿਹੜੇ ਪਿੱਛੇ ਸੁਣਿਆ ਬਾਅਦ ਚ ਪੜਿਆ ਲਿਖਿਆ ਉਹ ਉਹ ਭੁਲੇਖਾ ਡਣ ਰੋ ਬਾਅਦ ਵਿੱਚ ਬੋਲੇ ਉਹ ਸਾਰੇ ਦਾ ਵਿਦਲ ਬਣ ਕੇ ਕੋਈ ਗੱਲ ਨਿਕਲੀ ਜਿੱਥੇ ਕਿਤੇ ਸਾਈਡ ਤੇ ਗੱਲ ਜਾਂਦੀ ਸੀ ਕੀ ਪਤਾ ਕਿਧਰ ਐਂਗਲ ਉਹ ਲੋਆਲ ਗੀ ਉਹ ਤਾਂ ਦੂਤੀ ਦਾ ਵੀ ਅੰਗਲ ਹੁੰਦਾ ਹੈ ਕਿਹੜੀ ਇਸ ਦੀ ਰੈਕਸ਼ਨ ਪਹਿਲਾਂ ਉਹਦੀ ਕੁਝ ਹੋਰ ਸਮਝਿਆ ਦੀ ਅੱਜ ਅਸੀਂ ਹੋ ਸਮਝੀਏ ਨਹੀਂ ਉਹਰੇ ਕਥਿਆ ਗਏ ਉਹ ਪਤਨੀ ਜਦ ਪੈ ਰਿਹਾ ਹੁਣ ਇੱਕ ਫਰੇਮ ਬਣ ਰਿਹਾ ਫਰੇਮ ਬਣੂਗਾ ਆਟ ਪੈ ਜਨ ਹਰ ਵਾਰ ਜਪਾ ਹਰ ਕਾ ਭਗਤ ਪ੍ਰਗਟ ਨਹੀਂ ਸ਼ਫਰ ਆੜ ਪੈ ਜਨ ਹਰ ਵਾਰ ਜਪਾ ਜਪਦਾ ਚੱਲਦਾ ਜਪ ਨਾਲ ਚੱਲਦਾ ਹੈ ਸਮਪਣ ਤਾਂ ਜਪ ਨਹੀਂ ਚੱਲਦਾ ਹੁੰਦਾ ਕਿਉਂਕਿ ਪ੍ਰਾਪਤੀ ਜਪ ਚੋਂ ਹੈ ਸਮਪਣ ਚੋਂ ਪ੍ਰਾਪਤੀ ਸਮਪਣ ਦਾ ਜੋ ਚੀਜ਼ ਹੈ ਧਿਆਨ ਚ ਰੱਖਣੀ ਆਪਾਂ ਹੂੰ ਸਰਵਤਾ ਹੋਈ ਹੈ ਵੀ ਆਪਾਂ ਜੋ ਪੜ ਲਿਆ ਸਮਝ ਲਿਆ ਯਾਦ ਰੱਖਣਾ ਸਰਵਤਾ ਹੈ ਇਹ ਅਸਲ ਕਮਾਈ ਤਾਂ ਜਪ ਦੇ ਵਿੱਚ ਹੈ ਹੋਰ ਬ੍ਰਿੰਕੀ ਹੋਰ ਬ੍ਰਿੰਕੀ ਹੋਰ ਬ੍ਰਿੰਕੀ ਪ੍ਰਿੰਕ ਦੇ ਪ੍ਰਿੰਕ ਜਿਹੜਾ ਹੈਗਾ ਗਿਆਨ ਫੇਰ ਜਾ ਕੇ ਕਿਤੇ ਪਤਾ ਲੱਗਣਾ ਸਮਝ ਆਉਣੀ ਚਾਹੀਦੀ ਫੇ ਮੁਝਿਆ ਜਾਣ ਹਾਂਜੀ ਹਰ ਕਾ ਭਗਤ ਪ੍ਰਗਟ ਨਹੀਂ ਸਪੈ ਹਰ ਕਾ ਤਾ ਪ੍ਰਗਟ ਪ੍ਰਗਟ ਹੋ ਜਾਂਦਾ ਹੈ ਸ਼ਬਦਾਇਂ ਨਹੀਂ ਉਧਰ ਦੇਖੋ ਉਧਰ ਜਿਹੜਾ ਹੈਗਾ ਮਨ ਪਹਿਲਾਂ ਸੁਭੂਤ ਹੈ ਇੱਕ ਹੋਦਾ ਥੇ ਜੰਬ ਦਾ ਇੱਕ ਹੋਇਤਾ ਹੁਕਮ ਹੈ ਤਾਂ ਬਾਅਦ ਪ੍ਰਗਟ ਇੱਕ ਹੋਣਾ ਕਿ ਦੀ ਗੁਫਤ ਇੱਕ ਤਾਂ ਗੁਫਤ ਹੈ ਇੱਕ ਤਾਂ ਹੈ ਉਥੇ ਬਾਣੀ ਗੁਪਤਾ ਹੈ ਸਰ ਜੀ ਗੁਪਤੀ ਬਾਣੀ ਪ੍ਰਗਟ ਹੋਏ ਬਾਣੀਆ ਗੁਪਤੀ ਇਹ ਹੋਰ ਹੋਰ ਗੁਪਤੀ ਹੈ ਜਬ ਬਾਣੀ ਪ੍ਰਗਟ ਹੁੰਦੀ ਹੈ ਗੱਲ ਹੋਰ ਅੱਗੇ ਦੋਪਤ ਹੋਦੀ ਹੈ ਉਹੀ ਚੀਜ਼ ਆਪਣੇ ਅੰਦਰ ਹੈ ਭੋਗੇ ਦੀ ਜਬ ਉਹ ਪ੍ਰਗਟ ਹੋ ਜਾਂਦੀ ਹੈ ਵਿਚਾਏ ਆਪਣੇ ਅੰਦਰ ਹੈ ਗੁਪਤਾ ਹੈ ਹਰ ਕੀ ਭਗਤੀ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੇਤੇ ਕਰੇ ਹਰ ਕੀ ਭਗਤ ਜਿਹੜੀ ਹਰ ਕੀ ਭਲਦਾ ਇਹਨੇ ਬਹੁਤ ਸਾਰੇ ਮੁਕਤ ਕੀਤੇ ਨੇ ਇਹਦੀ ਗੱਲ ਵੀ ਕੋਈ ਮੁਕਤੇ ਕਦੀ ਕਿਹਦੀ ਕਹਾਣੀ ਦਸੀਏ ਇੱਕ ਉਹਨਾਂ ਚਾਕੇ ਤਰੂ ਬੱਲਾ 2000 ਕਹਾਣੀਆਂ ਦੱਸਦੀ ਹੈ ਇਤਨੀ ਕੋਈ ਜਿੰਨੇ ਵੀ ਸੱਚਖੰਡ ਮੁਕਤ ਹੋ ਗਏ ਨੇ ਹਰ ਕੀ ਭਗਤੀ ਨਾਲ ਗਏ ਬਹੁ ਕਰੇ ਗਏ ਨੇ ਕੋਈ ਸਾਖੀਆਂ ਦਾ ਤਾਂ ਨਹੀਂ ਹੈ ਜੇ ਥੋੜੇ ਜੇ ਦੋ ਚਾਰ ਬੰਦੇ ਹੀ ਤਰੇ ਹੁਣ ਇਹ ਧਰਮਾਂ ਹਰਮਾਂ ਕਰਦੀ ਹੈ ਨਾ ਇਸ ਦਾ ਕਹਿਣਾ ਇਹ ਸਾਖੀਆਂ ਲਿਖਣ ਦੀ ਲੋੜ ਨਹੀਂ ਹੈ ਵਿਧੀ ਲਿਖੋ ਕਿਹਾ ਵਿਧੀ ਹੈ ਵਿਧੀ ਨਹੀਂ ਕੋਈ ਵੀ ਮੁਕਤ ਹੋ ਜਾ ਜਿਹਨੇ ਹਾਂ ਜੇ ਬਿਲੀ ਗਲਤ ਆ ਕੋਈ ਹੋਇਆ ਨਹੀਂ ਉਹ ਉਹ ਵੀ ਹੋ ਜਾ ਦੋ ਆਹ ਤਾਂ ਹਰ ਨਾਲ ਜਪੇ ਆ ਹਾਂ ਘੇਰੇ ਪਾਸ ਤੇ ਪ੍ਰਗਟ ਹੈ ਜੀ ਜਿਵੇਂ ਕੋਈ ਉਹ ਜਿਵੇਂ ਜਾਪਦਾ ਤੇ ਤੂੰ ਕੀ ਬਗਵੰਤਾ ਹੈ ਬੇਰੂਪੀਆ ਨਹੀਂ ਅਸਰ ਉਹ ਜਿਹੜੀਆਂ ਗੱਲਾਂ ਗੁਪਤ ਨੇ ਇਹਦੇ ਵਿੱਚ ਗੁਰਬਾਣੀ ਚੋਂ ਉਹ ਪ੍ਰਗਟੇ ਕਿਵੇਂ ਜਿਹੜੀ ਗੱਲ ਕਹਿਣ ਤੇ ਰਹਿ ਗਈ ਕਹੀ ਨਹੀਂ ਗਈ ਉਹ ਕਿਵੇਂ ਹੋ ਗયું ਹਾਂ ਨਾਲ ਹੀ ਘੜ ਘਟ ਗਈ ਜਦੋਂ ਇਹ ਜਗਲੀਰ ਨਹੀਂ ਪੂਰੀ ਹੋਈ ਹਾਂ ਉਹਦਾ ਕੰਮ ਬਦਲ ਗੂਗਾ ਖਲਾਸ ਹੋਊਗਾ ਹਾਂ ਤੇ ਗਾਣੀ ਬਦਲ ਗੂਗਾ ਜਿਵੇਂ ਅੱਜ ਇੱਕ ਫੋਕਸ ਵੱਜਵਾ ਹੋ ਗਿਆ ਕੋਈ ਮਨੇ ਕਾਲ ਹੈ ਇਕੇ ਜ਼ਿਆਦਾ ਗਾਲ ਨਹੀਂ ਕਾਲ ਵੀ ਆਪਣਾ ਹੀ ਆ ਆਦਮ ਕਾ ਸੀ ਹੋਇਆ ਠੀਕ ਆ ਤੂੰ ਇਹਨੂੰ ਨਹੀਂ ਮਾਰ ਸਕਦਾ ਜੇ ਫਿਰ ਮੈਂ ਆ ਨਾਨਕ ਜਨ ਸੰਗ ਕਹਤੇ ਤੇਰੇ ਨਾਨਕ ਜਨ ਸੰਗ ਕਹਤੇ ਤੇਰੇ ਜਿਹੜਾ ਹੁੰਦਾ ਉਹਦਾ ਸੁਭਤ ਨਾਲ ਕਹਤੇ ਦੱਦਦੇ ਨੇ ਜਿਹੜਾ ਜੱਜ ਹੁੰਦਾ ਹਰ ਕਾ ਵਾਲਾ ਹਰ ਵੀ ਸੰਤ ਕਰਨ ਵਾਲੇ ਹੋਰ ਦੱਦਦੇ ਨੇ ਇਹ ਕਿ ਵਰਤਦਾ ਖਾਂ ਅਸਾਂ ਕਰੋੜ ਬਿਲਕੁਲ